ਜਿਨ ਨਾਮੇ ਵਿਰੋਧ ਸ਼ਰੀਰ ਕਿਉ ਨਾ ਮਿਲੇ ਕਾਂਟੇ ਮਨ ਧੀਰ ਇਸ ਕਰਤੇ ਬਿਲੋ ਬੇਰੋਸਰੀ ਦੋਬਤੇ ਬਿਲੋ ਸ਼ਰੀਰ ਉਬਰਦਾ ਹੈ ਰੋਦੈ ਉਬਰਲ ਜਿਹਾ ਫਸਿਆ ਹੋਇਆ ਹੈ ਹਮਮ ਉਗੜਨ ਲਾ ਲੋਕ ਅੱਛੜਦੇ ਹੀ ਆਉਂਗਣ ਲੋਕੋ ਸਾਰੀ ਉਹ ਬਲਦੇ ਜੀਰਾ ਕੱਢਦੇ ਹੀ ਹਾਂ ਹਾਂ ਹਾਂ ਕਿ ਕੁੱਟ ਜਾਏ ਇਹ ਉਹਨਾਂ ਕਟਿਆ ਦੇ ਜੰਦੀ ਪੀੜਾ ਮਨ ਧੀਰ ਅਬਦੀ ਜੋ ਜੂ ਕਾ ਮਨ ਦੇ ਵਿੱਚ ਧੀਰ ਜਾਊਗਾ ਸ਼ਰੀਰ ਤੋਂ ਕੀ ਭਾਬਾ ਜੀ ਬਿਨਾਂ ਨਾਮ ਹੈ ਬਿਰੋਧ ਸ਼ਰੀਰ ਉਦਲਾ ਸ਼ਰੀਰ ਠੀਕ ਹੈ ਜੀ ਵਾਟ ਵਟਾਉ ਆਵੇ ਜਾਏ ਕਿਆ ਲੈ ਆਇਆ ਕਿਆ ਪੱਲੇ ਪੱਲੇ ਪਾਈ ਹਾਟ ਬਟਾ ਉਹ ਆਵੇ ਜਾਏ ਉਂਗਾ ਜਾਂਦਾ ਜੰਦਰ ਜਰਾ ਬਾੜ ਡੁੱਟਾ ਹੁਆ ਇਹ ਲਾ ਲੋ ਬਾੜ ਡੁੱਟਾ ਹੁਆ ਦੁਰਦਰਨ ਦੁਰਦਰਨ ਬਾੜ ਹੈ ਬਦਲਦੀ ਰਹਦੀ ਠੀਕ ਹੈ ਜੀ ਆਵਰ ਜਾਏ ਕੀ ਆਲਾ ਆ ਬੱਲੇ ਪਾ ਰਿਹਾ ਕਾ ਲੈ ਕੇ ਆਇਆ ਕੁਛ ਵੀ ਹਮਮ ਉਸਾਲ ਦੇ ਗੋਜੂੜੀ ਠੀਕ ਹੈ ਜੀ ਬਿਨ ਨਾਮੇ ਟੋਟਾ ਸਭ ਮਿਲੇ ਤਾਂ ਦੇ ਬੁਝਾਈ ਆ ਜਬ ਬੁਝੇ ਲੰਦਾ ਚਲਾ ਹੈ ਸਭ ਜਲਾ ਤੋ ਠਾਈ ਤੋ ਠਾਈ ਠੀਕ ਹੈ ਜੀ ਬੁੱਝ ਲਿਆ ਲੱਗਾ ਹੁਣ ਵਣਜ ਵਪਾਰ ਬਣਜੇ ਵਪਾਰੀ ਵਿਣ ਨਾਵੇਂ ਕੈਸੀ ਪਤਸਾਰੀ ਬਣਜੇ ਬਾਪਾਰ ਬਾਪਾਰ ਬਣਜੇ ਵਪਾਰ ਨਸਬੋਏ ਬਣਜੇ ਵਪਾਰੀ ਮੈਂ ਵਪਾਰੀ ਹੋਵੇ ਤਾਂ ਬਣਜੇ ਵਿਣ ਨਾਵੇਂ ਤੋਂ ਲੋਕ ਤੇ ਮੇਨੋਂ ਬਣਦੀ ਜਗਾ ਕੱਲ ਦਾ ਸਾਰਾ ਕੱਟਾ ਹੀ ਕੱਟਾ ਲੋਕ ਤੇ ਮੇਨੋਂ ਜੋ ਵੀ ਬਣਦਾ ਉਹ ਦੇ ਹੀ ਠੀਕ ਹੈ ਜੀ